कई कोट पह बैरागी राम नाम संग तिनले बलगि कई कोट पह बैरागी के हाथ है जय जय पाना दे रखे नानक सब कुछ प्रभु के हाथ ठीक है लो भी ये बात कई कोट पह बैरागी राम नाम संग तिनले बलगि कई कोट पह बैरागी कई करोड़ ऐसे नए बारामचंद हैं और माया وچوں دا ستے وہ माया وچوں دا ستے بھرا جی انہاں اندر کوئی माया دی کھکھ नहीं پہلے چ سතුخی نہیں ہوندی اج دے تھلے پوڑے چل رہے ہیں نا جیویں دی ہوندی اے صرف آدمی ہونگے ਰਾਗ ਜੇ ਸਟੇਜ ਜਾਣੀ ਵਾਲੀ ਗੱਲ ਹੈ ਤੇ ਬੈਰਾਗੀ ਤੋਂ ਅਨੁਰਾਗੀ ਹੋਣਾ ਨਾ ਉਹ ਬੈਰਾਗੀ ਵੀ ਨਹੀਂ ਅਨੁਰਾਗੀ ਵੀ ਨਹੀਂ ਹੋ ਸਕਦੇ ਬੈਰਾਗੀ ਅਨੁਰਾਗੀ ਹੈ ਜੇ ਆਪਣਾ ਪਾਣਾ ਛੱਡੂ ਆਪਣਾ ਪਾਣਾ ਛੱਡਣਾ ਤੇ ਬੈਰਾਗੀ ਆ ਹੁਕਮ ਵਿੱਚ ਚੱਲਣਾ ਅਨੁਰਾਗੀ ਜਿਨ੍ਹਾਂ ਦੇ ਆਪਣੀ ਇੱਛਾ ਚੱਲ ਰਹੀ ਹਾਂ ਰਾਗ ਚੱਲ ਨੇ ਆਪਣਾ ਪਾਣਾ ਰਾਗ ਹੈ ਆਪਣੇ ਪਰੇ ਦਾ ਤਿਆਗ ਬੈਰਾਗ ਹੈ ਆਪਣੀ ਇੱਛਾ ਦਾ ਤਿਆਗ ਬੈਰਾਗ ਹੈ ਪਰਮੇਸ਼ਰ ਦੀ ਇੱਛਾ ਨੂੰ ਪਛਾਣ ਕੇ ਉਹਨੂੰ ਬੁੱਝ ਕੇ ਉਹਦੇ ਅਨਸਾਰ ਕੰਮ ਕਰਨਾ ਜਿਵੇਂ ਗਿਆਨ ਲੈ ਕੇ ਚੁੱਪ ਕਰਕੇ ਬਹਿ ਜਾਣਾ ਬੈਰਾਗ ਹੈ ਗਿਆਨ ਲੈ ਕੇ ਗਿਆਂਦੀ ਪਰਮੇਸ਼ਰ ਵਾਲੀ ਲੜਾਈ ਲੜਣਾ ਰੋਗ ਕੋਈ ਚੰਡੀ ਵਾਲੀ ਲੜਾਈ ਲੜੀ ਹੋਰ ਰੋਗ ਤਾਨ ਨੇ ਕਿਹਾ ਬੇਰਾਗੀ ਨੂੰ ਕਿਹਾ ਬੇਰਾਗੀ ਨੂੰ ਕਿਹਾ ਪਹਿਲਾ ਮਾਨਕ ਬੋਲ ਅਸਰ ਸਾਰੀ ਮਾਨਕ ਬੋਲ ਫਿਰ ਜੇ ਅਨੁਰਾਗੀ ਬੰਦੇ ਦੀ ਬੇਰਾਗੀ ਹੋਵੇ ਬੇਰਾਗੀ ਨੂੰ ਕਿਹਾ ਸੱਤੋ ਖੀਰੂ ਕਿਹਾ ਸੱਤੋ ਖਾਲੇ ਨੂੰ ਵੀ ਜੇ ਪੰਗਾ ਲੈਣਾ ਨਾ ਬੁਰਾ ਵਾਲਾ ਪਰਮੇਸ਼ਾਹ ਦੀ ਲੜਾਈ ਵਿੱਚ ਲੜਨੀ ਆਪ ਸਾਡੀ ਦੀ ਲੜਾਈ ਲੜੀਆਂ ਝੂਠ ਨਾਲ ਆਪ ਪਹਿਲਾਂ ਮंडकਬੂਦ ਲੜਾਈ ਤਾਂ ਮंडकਬੂਦ ਤੇ ਲੜੀ ਜਾਂਦੀ ਹੈ ਕੋਈ ਵੀ ਹੋਵੇ ਜੇ ਤੁਸੀਂ ਲੜਾਈ ਲੜਨੀ ਹੈ ਜੰਗ ਲੜਨੀ ਹੈ ਤਾਂ ਉਥੇ ਲੜੇ ਨਹੀਂ ਸਕਦੇ ਤੁਸੀਂ ਲੜਾਈ ਲਾਣਾ ਤੁਹਾਡਾ ਇਰਾਦਾ ਹੀ ਨਹੀਂ ਲੜਾਈ ਜੇ ਤੁਸੀਂ ਮਨ ਨਹੀਂ ਕਬੂਲ ਕਰਦੇ ਲੜੇ ਨਹੀਂ ਸਕਦੇ ਲੜਾਈ ਹੋਈ ਨਹੀਂ ਹੋਏ ਪ੍ਰੋਬਲਾਈਟੀ ਕਰ ਸਕਦੇ ਤੁਸੀਂ ਨਹੀਂ ਹਾਂ ਚੁੱਪ ਸੱਤਾ ਸੀ ਅਲੈਕਾ ਬੁਕੇ ਫਿਰ ਤਾਂ ਭੱਗਦੇ ਬਹਿ ਜਾਣਾ ਗਦਬ ਜਾਤ ਦੀ ਗੱਲ ਹੈ ਭਾਗੇ ਜੇ ਵਾਗ ਉਲਟਾ ਹੋ ਕੇ ਪੈ ਜਾਏ ਸ਼ੇਰ ਨੂੰ ਬਚਨ ਨਹੀਂ ਵਰਦਾ ਉਹ ਮਾਰਡ ਘੋੜ ਕਰਕੇ ਨਹੀਂ ਗਿਆ ਸ਼ੇਰ ਜਿਹੜਾ ਭੱਜ ਕੇ ਆਪਣੀ ਆ ਜਾਂਦਾ ਜਦ ਜਬ ਗੌਰ ਦੇ ਗੜਜੋ ਨਿਕਲ ਕੇ ਜਾਂਦੇ ਸੀ ਮਾਨਖੂਰ ਮੇ ਹੋਈ ਜਾਂਦੇ ਸੀ ਕਬੂਲੇ ਦਾ ਫੈਲਾ ਨਹੀਂ ਹੋਇਆ ਉਹਦਾ ਸਾਫਤ ਕੀਤਾ ਉਥੇ ਤਾਂ ਉਹਨੇ ਸਾਫ ਤੇ ਕੀਤਾ ਉਹਦਾ ਕਬੂਲੇ ਦਾ ਫੈਲਾ ਨਹੀਂ ਸਾਫ ਤੇ ਕੀਤਾ ਉਥੇ ਤਾਂ ਆ ਕਬੂਲੀ ਦਾ ਉਹ ਵੀ ਬਰਾਗੀ ਨੂੰ ਨੂੰ ਬਰਾਗੀ ਨੂੰ ਬਾਅਦ ਕਿਹਾ ਫਿਰ ਇਹ ਅਨੁਰਾਧੀ ਹੈ ਅਨੁਰਾਗ ਹੈ ਜਨਮ ਤੇ ਮਾਰੇ ਲੇਖੇ ਵਾਦੋ ਉਹ ਜਿਹੜਾ ਤੇ ਮਾਰੇ ਲੇਖੇ ਜਨੂ ਉਹ ਅਨੁਰਾਧੀ ਹੈ ਉਹ ਉਹ ਲੜਾਈ ਲੜੀ ਆ ਬਖਤਾਂ ਦੀ ਕਹਿੰਦੇ ਨੇ ਦਵਾਈ ਹੋਇਆ ਕਹਿੰਦਾ ਜਿਹੜੇ ਨੇ ਉਹ بڑے بڑے ਇਹ ਪਰਮਦਾਨ ਉਹ ਜਦੋਂ ਦੰਗਾ ਕਰਦੇ ਦੇਗਨ ਦਾ ਲੜਾਈ ਹੋਈ ਯਾਰ ਉਹ ਕਹਾਂ ਮੈਨੂੰ ਦੇ ਡੰਡਾਉਤਾ ਦੇ ਰਾਤੀਆਂ ਉਹ ਕਹਦੇ ਚੁਬਟਾ ਲੜਾਈ ਹੋਈ ਯਾਰ ਕਰਕੇ ਲੜਾਈ ਭੁਕੇ ਜਾਂ ਡੰਡਾਉਤ ਕਰਕੇ ਲੜਾਈ ਹੱਥ ਘੜੇ ਕਰਦੇ ਲੜਾਈ ਖਤਮ ਹੋਉਂਦੀ ਹੋਈ ਕਈ ਕੋਟ ਪ੍ਰਮਖੋਂ ਅਦਮੇ ਪਰਮ ਬ੍ਰਹਮ ਲਹੂ ਤੇ ਕੋੜ ਪ੍ਰਭ ਕੋ ਖੋਜਨਤੇ ਕਈ ਰਾਮ ਨਾਮ ਸੰਤਿਨ ਲਿਬ ਲੱਗੀ ਕਈ ਕੋਟ ਪੈ ਬਹਿ ਰਾਗੀ ਬੈਰਾਗੀ ਕਿੰਦੇ ਨਾਲ ਲਿਬ ਲੱਗਣੀ ਜਿਹੜੇ ਸੰਤੋਖੀ ਹੋ ਜਾਂਦੇ ਨੇ ਬੈਰਾਗੀ ਹੋ ਜਾਂਦੇ ਨੇ ਉਹ ਫੇਰ ਕੀ ਕਰਦੇ ਨੇ ਆਰਾਧਨਾ ਕਰਦੇ ਨੇ ਆराधना ਆਰਾਧਾ ਨੀਕਾ ਹਰ ਹਰ ਨਾਮ ਉਹ ਬੈਠੇ ਹੁੰਦੇ ਤੇ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ ਉਹ ਨਾਮ ਉਹ ਦੇ ਦਿੰਦੇ ਉਥੇ ਇੱਕ ਮੂਹਰੇ ਜਲਕਾਰਨਾ ਹੈ ਚਾਤਰ ਦੁਖ ਵੀ ਦੁਖੀ ਹੁੰਦੇ ਜੀ ਅਜੋ ਸੁਖ ਨੂੰ ਦੁੱਖ ਨਾਮ ਦੀ ਗੂੰਦ ਦ ਉਹ ਮੂਹਰੇ ਦਾ ਆ ਕੇ ਪਰਦਾ ਪਰਦਾ ਪਾਣਾ ਹੈ ਆਗੇ ਆਖਰੀ ਭਰਮ ਦਾ ਜਿਹੜਾ ਹੈ ਨਾ ਤਲੰਕੋ ਉਹ ਬੂਜ਼ਰਾਂ ਨੇ ਬੈਠੇ ਨੇ ਜਨਮ ਦਾ ਦੋਸੇ ਬੂਜ਼ਰਾਂ ਮਿਲਦੇ ਨੇ ਉਹ ਉਥੇ ਹੀ ਤੋਂ ਬੂਜ਼ਰ ਹੀ ਹੈ ਜਰੂਰ ਬਚਾਤਰ ਉਹ ਨਹੀਂ ਹੈਗਾ ਉਹ ਕੋ ਨਹੀਂ ਹੈਗਾ ਉਹ ਕਰਨ ਕਮਲ ਮੇ ਪਾਵਾ ਜਦੋਂ ਕਰਨ ਬਾਹਰ ਆ ਕੇ ਪਈ ਕਬਰ ਵਿੱਚ ਸਸੇ ਵਿਗਾਸ ਨਹੀਂ ਆਉਂਦਾ ਫੇਰ ਪਰਦਾ ਖਤ ਹੁੰਦਾ ਪਰਮ ਦਾ ਦੁਆਰਾ ਨਹੀਂ ਹੋਣਾ ਸਸੇ ਵਿਗਾਸ ਭਗਤਾਂ ਸਦਾ ਵਿਗਾਸ ਸੱਤ ਪੜ ਨਹੀਂ ਆਵਾ ਪਰਦਾ ਪਾੜਦਾ ਜਿਹੜਾ ਪਰਮ ਦਾ ਫੇਰ ਪਰਦਾ ਦੁਆਰਾ ਨਹੀਂ ਪੈਦਾ ਉਹ ਬੂਧ ਨਾ ਪਰਦਾ ਪਾੜਦਾ ਉਹ ਆਰਾਧਨਾ ਨਾ ਮਿਲਦੀ ਹੈ ਪਹਿਲਾ ਜਪਣਾ ਸਾਡੇ ਆਪਣੇ ਲੈਵਲ ਦੀ ਗੱਲ ਹੈ ਜਪਣਾ ਤਾਂ ਇਥੇ ਬੇਰਅਮੀ ਕਰਕੇ ਜਾਂਦਾ ਜੋ ਵੀ ਬੇਰਅਮੀ ਚਤਵੰਦੀ ਇੱਛਾਵਾਂ ਦੀ ਸਮਾਪਤੀ ਸ਼ਬਦ ਇੱਛਾਵਾਂ ਨੂੰ ਯਾਨੀ ਜਿਹੜੀਆਂ ਜਿੱਦੀਆਂ ਇੱਛਾਵਾਂ ਨੇ ਇਹਨਾਂ ਨੂੰ ਸਾਰਿਆਂ ਦੀ ਸੇਵਾ ਕਰਕੇ ਇਹਨਾਂ ਹੱਥ ਜੋੜ ਕੇ ਮਾਰੇ ਗੁਰਦਿਆਂ ਆਇਓ ਜਦ ਅਨੁਯੋਗ ਤੁਸੀਂ ਸੇਵਾ ਲੈਣੀ ਲੈ ਲਓ ਅੱਜ ਵਰਗਦਾਰ ਸੰਦਲ ਦੀ ਲੋੜ ਨਹੀਂ ਐ ਵੇਲੇ ਅਜੋ ਬਤੀ ਲਗ ਆ ਲੋਕੋ ਕਾਰ ਅਬਮਾਨ ਕਰ ਜਾ ਹਾਂ ਹਾਂ ਇਹਨੂੰ ਅਬਾਨ ਕਰ ਕਿ ਅਜੋ ਲੈ ਲੈ ਲੈ ਬੱਕਲਾ ਛੱਡ ਜਾਓ ਇਹ ਤੁਹਾਡੀ ਕੋ ਲੈ ਜੱਤਰ ਬੈਣ ਜੇ ਫਿਰ ਤਾਂ ਕੋਤੇ ਲੱਭੋ ਬੇਮਗਰ ਆਇਤਾ ਬੰਨੇ ਆ ਸੰਦਲ ਲਾ ਕੇ ਤੁਹਾਨੂੰ ਬੋਧਣ ਦੇਰੇ ਤੇ ਦੇਖਾਂ ਪਿਆ ਫਰੇ ਇਹ ਬਮਾਨ ਕਰ ਝਾੜਿਓ લો અપમાન તે વિના લોભ લોભી ਦਾ લાજ અપમાન હંજી કઈ કોટ બ્રહ્મ કો ખૂજંતે કઈ કોટ પ્રભુ કો ખોજંતે ખોજ દે દે આત્મ મે પરબ્રહ્મ લહમતે કબ ब्रह्मा ओही मन ब्रह्मा ਦਾ ਮਨ ਨਹੀਂ ਹੁੰਦਾ ਅਸੀਂ ਉਹਨਾਂ ਕਹਿੰਦੇ ਕੋਈ ਗੱਲ ਹੈ ब्रह्मा ਆਪਣੇ ਆਪ ਜੇ ਮਾਨ ਹੈ ਜੇ ਕਹਿੰਦੇ ਇੱਕ ਮਨ ਸਦਾ ਤੇ ਆਈ ਹੈ ਦੋਗਤ ਬੰਤਕ ਕੋਈ ਹੈ ਫਿਰ ਦੋਗਤ ਮੈ ਉਹ ਮਨ ਹਰਜੀਤ ਹੈ ਤੂੰ ਚੋ ब्रह्मा दैट ਮਨ ਉਹ ਹੀ ਮਾਨ ਹੈ ਦੁਆ ਨਹੀਂ ਹੈ ब्रह्मा ਦਾ ਮੂਲ ਕੀ ਹੈ ਹੁਣ ਸੁਬਾਨ ਹੈ ब्रह्मा ਦਾ ਘੋੜਾ ਬਾਦ ਬ੍ਰਹਮ ਨਾ ਪੂੜੇ ਬਰਬੂਹ ਕੁਛ ਏਰੀਆ ਦੇ ਵਿੱਚ ਜਿਹੜਾ ਨੇਰੇ ਦੇ ਬਾਦਿਆ ਨਾ ਜਫਾ ਜਿੰਨੇ ਏਰੀਆ ਚ ਦੁਸ਼ਮਣ ਦਾ ਕਬਜ਼ਾ ਹੋ ਗਿਆ ਗਿਆਨਤਾ ਦਾ ਕਬਜ਼ਾ ਹੋ ਗਿਆ ਉਹ ਏਰੀਆ ਲੈਣਾ ਜੋ ਜਿੱਤਣਾ ਗੱਲ ਉਹ ਬੂੜਾ ਉਹ ਉਹ ਰਹਿੰਦਾ ਜਿੱਤਣ ਤੇ ਸਾਡੇ ਕੋਲ ਹਾਂ ਦਾ ਭਾਂਕਾ ਕਿਹਾ ਨਾ ਹੋਣਾ ਜਿਹੜੇ ਕਿ ਸਾਡੇ ਨੇਰਾ ਉਹ ਏਰੀਆ ਜੇ ਰੋਸ਼ਨੀ ਪੈਦਾ ਕਰਦੀ ਹੈ ਇਹ ਸਾਡਾ ਟਾਰਗੇਟ ਹੈ ਉਹ ਜਿਹੜਾ ਏਰੀਆ ਜਿਹਦੇ ਨੇਰਾ ਸਾਡਾ ਰੂਪ ਉੱਡਾ ਹੈ ਉਹ ਸਾਡਾ ਰੂਪ ਹੈ ਪੂਰੇ ਪੂਰਨ ਬ੍ਰह्म ਸਾਡਾ ਮੂਲ ਹੈ ਪੂਰਨ ਬ੍ਰह्म ਤੋਂ ਸਾਨੂੰ ਘਾਟਾ ਪਿਆ ਪੂਰਨ ਬ੍ਰह्म ਉਹ ਤਾਂ ਪੂਰਨ ਬ੍ਰह्म ਨੂੰ ਜਾਨਤਾ ਜੀਵ ਹੈ ਬਸ ਉਹ ਪ੍ਰਭੇ ਬੈਠਾ ਸਾਰਾ ਸੱਚਖੰਡ ਹੋਰ ਕੌਣ ਹੈ ਸੱਚਖੰਡ ਪ੍ਰਭ ਲਈ ਪ੍ਰਭੇ ਹੈ ਸੱਚਖੰਡ ਦੇ ਪ੍ਰਭੇ ਨੇ ਫਿਰ ਇੱਕ ਨੂੰ ਲੈ ਕੇ ਗੱਲ ਕਰਤੀ ਪ੍ਰਭ ਹਰ ਹਰ ਹਰਜੂਜ ਫਰਕਰ ਜਿਆਦੇ ਬ੍ਰਹਮਾ ਤਾਂ ਹਰ ਹੈ ਕਾ ਪੂਰਨ ਬ੍ਰਹਮ ਇਕੱਲਾ ਹਰ ਹੈ ਜਦੋਂ ਬ੍ਰਹਮ ਇਹਦਾ ਨਾਲ ਅੱਲਾ ਹਰ ਆਉਂਦਾ ਜਦ ਇਹ ਬ੍ਰਹਮ ਇਤਨਾ ਹਰ ਜਿਉ ਹਰ ਜੂ ਹਰ ਜੂ ਹਰ ਬੰਧ ਹਰ ਜੂ ਹਰ ਬੰਧ ਆਉਣਗੇ ਹਰ ਜੂ ਹਰ ਬੰਧ ਆਉਣਗੇ ਹਰ ਜਿਉ ਕੋ ਭਲ ਦਰ ਕੇ ਬਾਜਾ ਬਹਣ ਨਾਲ ਜਿਉ ਜਾਂਦਾ ਇਹ ਨਾਲ ਜਿਉ ਜਾਂਦਾ ਜਾਂ ਬੁਰਾ ਬਲ ਚਾਹਦਾ ਬੁਰਾ ਬਲ ਉਹ ਹਰ ਜਿਹੜਾ ਜ ਮਰਮਰ ਹੁੰਦੇ ਵਿੱਚ ਹੈ ਉਹਦੇ ਦਾ ਜੋ ਹੈ ਜਿਉਂ ਲੱਗਦਾ ਮੈਂ ਉਹ ਉਹ ਕੋਣ ਰਬ ਇਹ ਜਿਹਨੇ ਨੇ ਥੋੜੀਆਂ ਜਿਹੜੀਆਂ ਦੇ ਨਾਲ ਆ ਜੋ ਪੂਰੀ ਉਹ ਅੱਜ ਦਿਨ ਹੋ ਜਿੱਚੇ ਰਿਹਾ ਫਿਰ ਚੜ੍ਹਣੀ ਕਲੀਅਰ ਨਹੀਂ ਆਇਆ ਬੱਚੇ ਪੁਆਇੰਟ ਨੇ ਇਹ ਬ੍ਰੇਕੀ ਦੇ ਪਰ ਉਹ ਬ੍ਰੇਕੀ ਦੇ ਪੁਆਇੰਟ ਆਉਂਦੀ ਜਦੋਂ ਲੋਡ ਪੈਂਦੀ ਹੈ ਜਿਹੜੀ ਚੀਜ਼ ਦੀ ਜਦੋਂ ਲੋਡ ਤਾਂ ਉਦੋਂ ਹੀ ਹੁੰਦੀ ਹੈ ਉਹ ਜਿੱਥੇ ਨਹੀਂ ਸਮਝ ਆਉਂਦੀ ਜਾਂ ਨਹੀਂ ਸਮਝ ਹੁਣ ਆਉਗੀ ਉਹ ਇਥੋਂ ਨਹੀਂ ਆਉਣੀ। ਚੋਵੇਂ ਅਸੀਂ ਇਹ ਲਫ਼ਜ਼ਾਂ ਨੂੰ ਉਹਨਾਂ ਕਲੀਅਰ ਪਹਿਲਾਂ ਕਰ ਰਿਹਾ ਜੀ। ਲੋੜ ਨਹੀਂ ਸੀ, ਲੋੜ ਹੋਣੀ ਹੈ। ਉਹਦੀ। ਉਦੋਂ ਸਮਝ ਨਹੀਂ ਆਉਣੀ ਉਦੋਂ ਤੇ ਸਮਝ ਆਉਣੀ ਹੈ। ਕਿ ਆਦਮ ਨੇ ਰਹਿਣਾ ਹੁੰਦਾ। ਹਾਂ ਸਗੋਂ ਉਹਦਾ ਨੁਕਸਾਨ ਹੋ ਜਾਂਦਾ ਉਸ ਉਰੇ ਪਾਸੇ ਨੇ ਹੁਣ ਉਹਨੂੰ ਰਸਾਨ ਹੋਇਆ ਹੋਇਆ ਉਹਦਾ ਗੁਰਦੀ ਦਾ ਕਹੂੰਗਾ ਉਹ ਪਿੰਨਾਂ ਸਿਰੇ ਦੀਆਂ ਦਾ ਲਾਹਮ ਦਮਾ ਦੀ ਦਵਾਲੀਆਂ ਥੱਲੇ ਵਾਲੀਆਂ ਨੂੰ ਪਤਾ ਨਹੀਂ ਪ੍ਰੋਬਲਮ ਹੁੰਦੀ ਥੱਲੇ ਵਾਲਾ ਗਿਆ ਉਹਨੂੰ ਹੈ ਨਹੀਂ ਸਿਰੇ ਦੇ ਗਿਆ ਉਹ ਉੱਥੇ ਹਟ ਜਾਂਦੇ ਪ੍ਰੋਪਰ ਵੇ ਨਾਲ ਨਹੀਂ ਰਿਹਾ ਪ੍ਰੋਪਰ ਵੇ ਨਾਲ ਰਿਹਾ ਵੀ ਹੋਇਆ ਪ੍ਰੋਪਰ ਵੇ ਤੇ ਬੰਦੇ ਸਮਝਾ ਬਈ ਜੇ ਉੱਪਰੋਂ ਥੱਲੇ ਨੂੰ ਨਹੀਂ ਆਇਆ ਥੱਲੇ ਨੂੰ ਜਾਇਆ ਜਾ ਸਕਦਾ ਪ੍ਰੋਪਰ ਤਰੀਕਾ ਇਹ ਹੈ ਥੱਲੇ ਉੱਤੇ ਵੀ ਜਾਣ ਨੂੰ ਕਿਸੇ ਕੰਦਲ ਪ੍ਰੋਪਰ ਪਤਾ ਨਹੀਂ ਹੈ ਉਹ ਬ੍ਰਹਮ ਪੂਰਨ ਬ੍ਰਹਮ ਉਹ ਦਲੇ ਨੂੰ ਕਹਿੰਦਾ ਜੀ ਵਾਲਨ ਉਹ ਦੋ ਗੱਲਾਂ ਜਾਣਦਾ ਬਸ ਉੱਤੇ ਹੁਣ ਜਾਂਦਾ ਹੋਈ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਪਰ ਬ੍ਰਹਮ ਲਹਨ ਕੋਟ ਪ੍ਰਭ ਕੋ ਖੋਜਨ ਤੇ ਆਤਮਾ ਬਾਦ ਬ੍ਰਹਮ ਲਨ ਤੇ ਬਾਦ ਬ੍ਰਹਮ ਬਾਹਰ ਨਹੀਂ ਮਿਲਣਾ ਆਪਣੇ ਵਿੱਚੋ ਹੀ ਗੁਰਜੰਦਾ ਉਹਨੂੰ ਆਤਮਾ ਆਪਣੇ ਅੰਦਰੋਂ ਹੀ ਆਤਮਾ ਉਹ ਆਪਣੇ ਅੰਦਰੋਂ ਲਹਤੇ ਇਹਲੇ ਬਾਹਰ ਬ੍ਰਹਮ ਨੂੰ ਖੋਜਦੇ ਨੇ ਬਾਹਰ ਬ੍ਰਹਮ ਕੀ ਹੁੰਦਾ ਹੈ ਉਹ ਆਪਣੇ ਅੰਦਰੋਂ ਹੀ ਫਿਰ ਖੋਜ ਲੈਂਦੇ ਲੱਭ ਬਾਹਰ ਤਾਂ ਹੈ ਨਹੀਂ ਆਤਮਾ ਤੇ ਬਾਹਰ ਬ੍ਰਹਮ ਲਹੰਦੇ ਐ ਖੋਜ ਲੈਂਦੇ ਕਈ ਕੋਟ देखो कि यार प्रॉब्लम को जनते कई और प्रॉब्लम हो जेडा जो कि प्रभु कौन है भाई साद उते कौन है उते कोई नहीं है थोड़ी हुन उते कोई नहीं जो थोड़ी जेड़ा फेर आ जो खोजदा है कौन ब्रह्म दी अवस्था छोके भी खोजदा प्रभु उधर और प्रभु तो है, है नहीं कोई आत्म में पार ब्रह्म लहाते ਕੋਈ ਮੁੜ ਕੇ ਤੂੰ ਪਿਆਜ ਆ ਕੋ ਕਹਤਾ ਕੋਈ ਉਹ ਉਹ ਵੀ ਤੂੰ ਹੀ ਹੈ ਬੀਜ ਦਾ ਸੀ ਉਹ ਸੀ ਪੇੜ ਵੀ ਤੂੰ ਹੀ ਹੈ ਪੇੜ ਤੇਰੇ ਵਿੱਚ ਹੀ ਹੈ ਬੀਜ ਪੇੜ ਨੂੰ ਹੋਰ ਬੁਲਦਾ ਬੀਜ ਪੇੜ ਨੂੰ ਪਤਾ ਮੁੰਦਾ ਉਹ ਕਹਿੰਦਾ ਨਹੀਂ ਪੇੜ ਤੇਰਾ ਪਤਾ ਉਹ ਕਹਿੰਦਾ ਕਿਉਂ ਹਾਂ ਜੇ ਪੇੜ ਤਾਂ ਜਿੱਥੋਂ पैदा ਹੋਇਆ ਤੂੰ ਤਾਂ ਬਾਪਾਂ ਕੋਲੋਂ ਤੇਰਾ ਬਾਪਾਂ ਮੁਰਗੀ ਪਹਿਲਾਂ ਬਦਾਈ ਕੰਡਾ ਤੇ ਪੇੜ ਤਾਂ ਜਿੱਥੋਂ ਹੀ ਬਦਾ ਹੋਇਆ ਹੈ ਉਹਦਾ ਸੋਹ ਕੌਣ ਪੈਦਾ ਹੋਇਆ ਪਹਿਲਾਂ ਤਾਂ ਪੇੜ ਤੋਂ ਬੀਜ ਪੈਦਾ ਹੋਇਆ ਨਾ ਬੀਜ ਤੋਂ ਪੇੜ ਬਣਦਾ ਸਭ ਕੁਝ ਉਹਦੀ ਇੱਛਾ ਨਾਲ ਪੈਦਾ ਹੋਇਆ ਇਹ ਜਵਾਬ ਹੈ ਮੁਰਗੀ ਬਣੋਂ ਜਾਂਦੇ ਬਣੋਂ ਵਾਹ ਸਭ ਤੋਂ ਪੇੜ ਕੇ ਦੇਣ ਬੀਜ ਤੋਂ ਪੈਦਾ ਹੋਇਆ ਜੇ ਉਪਰ ਪੇੜ ਤੇ ਕੀ ਲਾ ਬੀਜ ਤੋਂ ਪੈਦਾ ਹੋਇਆ ਫਿਰ ਤਾਂ ਬੀਜ ਪੈਦਾ ਆ ਬੀਜ ਤੋਂ ਪੇੜ ਪੈਦਾ ਹੋਇਆ ਨਾ ਪੇੜ ਤੋਂ ਬੀਜ ਪੈਦਾ ਆ ਨਾ ਬੀਜ ਤੋਂ ਪੇੜ ਪੈਦਾ ਹੋਇਆ ਇਹ ਸਭ ਉਹਦੀ ਇੱਛਾ ਨਾਲ ਹੋਇਆ ਇਹ ਗੁਰਬੰਦ ਜਵਾਬ ਹੋਇਆ। ਕਈ ਕੋਟ ਦਰਸ਼ਨ ਪ੍ਰਭ ਪਿਆਸ ਤੈਨ ਮਿਲਿਓ ਤੇਨ ਕੋ ਮਿਲਿਓ ਪ੍ਰਭ ਅਬਿਨਾਸ਼। ਦਾਇਰ ਡਿਸਕਸ਼ਨ ਦਾ ਸਵਾਲ ਇਹ ਹੈ। ਇਹ ਤੋਂ ਕੁਝ ਲੱਭਣ ਵਾਲਾ ਵੀ ਪਹਿਲਾਂ ਕੌਣ ਦਾ ਹੋਇਆ ਸਾਡੇ ਸਭ ਸਾਨੂੰ ਗ੍ਰੀਟ ਚਾਹੀਦਾ। ਸੀ। ਉਨੇ ਜਿਹਨੇ ਪੈਦਾ ਕੀਤਾ ਕਿਵੇਂ ਨਾ ਕੀਤਾ ਉਸੇ ਦੀ ਲੈਣਾ ਸਾਧੂ ਜਗਤ ਚਾਹੀਦਾ ਸਾਡੇ ਕੋਲ ਹੁਣ ਦੋਵੇਂ ਮੁੰਗੀ ਵੀ ਪੈਦਾ ਕਰਕੇ ਚਲਾਉਣੀ ਹੈ ਫੇਰ ਤਾਂ ਇਹ ਗਿਆਨ ਲਓ ਤੁਸੀਂ ਕਿਹੜਾ ਸ੍ਰਿਸ਼ਟੀ ਪੈਦਾ ਕਰਦੀ ਹੈ ਦਾਦੀ ਚਲਾਉਣੀ ਹੈ ਕਿਸੇ ਚੀਜ਼ ਪਹਿਲਾਂ ਪੈਦਾ ਵੀ ਤੁਸੀਂ ਇਹਦਾ ਕਾਰਖਾਨਾ ਬਣਾਉਣਾ ਪਤੀ ਦਾ ਪਤਾ ਹੀ ਨਹੀਂ ਲੱਗਦਾ ਨੂੰ ਉਹਦਾ ਪਤਾ ਹੀ ਨਹੀਂ ਹਾਂਜੀ ਉਹਦਾ ਪਤਾ ਹੀ ਨਹੀਂ ਕਈ ਕੋੜ ਦਰਸ਼ਨ ਪ੍ਰਭ ਅਵਿਨਾਸ਼ ਕਈ ਕੋੜ ਦਰਸ਼ਨ ਪ੍ਰਭ ਪਿਆਸ ਕਈ ਕਰੋੜ ਇਹਨਾਂ ਨੂੰ ਪ੍ਰਭ ਦੇ ਦਰਸ਼ਨ ਦੀ ਪਿਆਸ ਹੈ ਤ੍ਰਿਸ਼ਨਾ ਨਹੀਂ ਹੈ ਥੋੜੇ ਨਹੀਂ ਬਹੁਤ ਨਹੀਂ ਬਹੁਤ ਨੇ ਨੇ ਦਰਖਾਨੇ ਨੇ ਬਹੁਤਾ ਵੀ ਪਤਾ ਹੈ ਲੋਕਾਂ ਨੂੰ ਬਹੁਤ ਥੋੜੇ ਆਦਮੀਆਂ ਨੇ ਜਿਆਦਾ ਤ੍ਰਿਸ਼ਨਾ ਵਾਲੇ ਜਿਆਦਾ ਤ੍ਰਿਸ਼ਨਾ ਆਦਮੀ ਜਾਂਦਾ ਮਾਜ ਚਲੇ ਜਾਂਦਾ ਅੰਦਰ ਫੇਰ ਜਿਹੜੇ ਕਮ ਕਮ ਠੀਕ ਹੈ ਵੀ ਭਾਈ ਰੋਟੀ ਮਿਲਦੀ ਹੈ ਠੀਕ ਹੈ ਸੁੱਖਦੀ ਬਹੁਤਾ ਕਿਤੇ ਕੰਮ ਘਾਵ ਨਾ ਹੋ ਜਾ ਉਹ ਦਰਸ਼ਨ ਫਿਰ ਚਦੇ ਨਹੀਂ ਹੁੰਦੇ ਬਹੁਤੇ ਦਰਸ਼ਨ ਪਰ ਇਹ ਤੋਂ ਜਿਹੜੇ ਗਹਾਂ ਲੱਗ ਜਾਂਦੇ ਨੇ ਉਹਨਾਂ ਨੂੰ ਮਿਲਿਓ ਕਰੋ ਲੱਗਣਾ ਜਿਹੜੇ ਉਹਨਾਂ ਦੇ ਵਿੱਚੋਂ ਗਹਾਂ ਨਹੀਂ ਕਰਦੇ ਨੇ ਨਾ ਉਹ ਦਰਸ਼ਨ ਜਿਹੜੇ ਜਾਂਦੇ ਨੇ ਖੁਦ ਸੰਤੇ ਨਹੀਂ ਦਰਸ਼ਨ ਪਿਆਸ ਵਾਲੇ ਸੰਤਾ ਕੋ ਜਾਣ ਵਾਲੇ ਕਰੋੜਾਂ ਆਦਮੀ ਦਰਸ਼ਨ ਪ੍ਰੋਤ ਪਿਆਸ ਵਾਲੇ ਹੁੰਦੇ ਨੇ ਗੁਰਬਾਣੀ ਕਹਿ ਰਹੀ ਹੈ ਉਹfoundੇ ਹੋਰ ਤੇ ਗੁਰੂ ਕਾਲਾ ਜੀ ਪਰਮੇਸ਼ਰ ਨੇ ਦੱਸਿਆ ਕੋਈ ਕਈ ਕਰੋੜ ਦਾ ਛਣਪਾ ਪਿਆਸ ਵਾਲੇ ਨੇ ਨਹੀਂ ਯਾਨੀ ਉਹ ਆਦਮੀ ਨੂੰ ਇੱਕ ਕਿਸਮ ਦੀ ਤਰਗੀ ਦਿੱਤੀ ਗਿਆ ਜਿਹੜਾ ਪਰਮੇਸ਼ਰ ਦੀ ਲੜਾਈ ਲੜਨ ਵਾਸਤੇ ਬੋਧ ਬਣਾਉਂਦਾ ਹੈ ਬਿਜ਼ਨਸ ਕੋਪ ਉਹ ਜਿਹੜਾ ਤੋਂ ਬਾਰ ਕਰ ਚੱਲੇ ਨਾਮ ਦਾ ਬਿਜ਼ਨਸ ਸਕੋਪ ਹੈਗਾ mera sauda bilkul qadr hon gi ehne batange bas hi hai ehne ghaag di hai bas aa gall hai iss saahi gall na sach hai ki hai sansaar ਕਿ ਜਿਸ ਆਟਰ ਨੂੰ 12 ਵਜਾ ਆਇਆ ਵੀ ਹੈਗੇ ਆ ਹਾਂ ਹਾਂ ਤੁਸੀਂ ਕਹੋ ਕੋਈ ਰਾਹ ਕਹਿੰਦੀ ਹੈ ਗੱਲ ਰਚਨਾ ਦੀ ਚੱਲੀ ਆ ਨਾ ਰਚਨਾ ਚ ਕੀ ਕੀ ਆ ਉਹ ਦੱਸੋ ਰਚਨਾ ساری ਰਚਨਾ ਹੀ ਹੈ ਸਮਰਹਿੰਦੇ ਗੱਲ ਚੱਲ ਰਹੀ ਹੈ ਤਾਂ ਕੋ ਜੀ ਕਈ ਕੋਟ ਦਰਸ਼ਨ ਪ੍ਰਭ ਪਿਆਸ ਤੈਨਕੋ ਮਿਲਿਓ ਇਹ ਸਵਾਲ ਹੈ ਉਹ ਕਹਿੰਦਾ ਜਿਹੜਾ ਤੈਨੂੰ ਮਿਲਿਆ ਸੱਚ ਉਹਨਾਂ ਨੂੰ ਮਿਲਿਆ ਤੈਨੂੰ ਨਹੀਂ ਮਿਲਿਆ ਪੰਜਵੇਂ ਪਾਸਾ ਅਗਲਾ ਮੈਨੂੰ ਨਹੀਂ ਮਿਲਿਆ ਇਹ ਪਰ ਉਹ ਮਾਹੋਨਾ ਨੂੰ ਮਿਲਿਆ ਉਹਦੀ ਵਜ੍ਹਾ ਨਾਲ ਤੁਸੀਂ ਸਮਝੇ ਕ੍ਰਪਾ ਜਾਨਾ ਇਹੀ ਕੀ ਕਿਰਪਾ ਕੇ ਭਾਏ ਹਬ ਨਹੀਂ ਹੋ ਸਕੋ ਕੋਈ ਗੱਲ ਆ ਫਿਰ ਉਹ ਜਿਹੜੇ ਨੇ ਉਹਨਾ ਖਤਰ ਆਏ ਇਹ ਗਿਆਨ ਉਹ ਕਹਿੰਦਾ ਕੱਲਾ ਮੇਰੇ ਖਾਤਰ ਮੈਨੂੰ ਤਾਂ ਮੂਰੇ ਕੀਤਾ ਹੋਇਆ ਕੋਈ ਡਾ ਪੈਪ ਆਉਂਦਾ ਜਿਹੜਾ ਭਰ ਕੇ ਪੈਪ ਜਾਂ ਦਰਿਆ ਪਾਣੀ ਦਾ ਦਰਿਆ ਪਾਣੀ ਭਿੰਦਾ ਕਿਦੇ ਵਾਸਤੇ ਆਏ ਦਰਿਆ ਵਾਸਤੇ ਬਣ ਆਇਆ ਓਏ ਲੋੜ ਐ ਦੀ ਇਹ ਬਟੇ ਦਰਿਆ ਦੀ ਲੋੜ ਐ ਹੁਣ ਮੈਂ ਵੀ ਤੇਰੇ ਨਾਲੋਂ ਤਨਾ ਕਿ ਹੁਣ ਸੱਜ ਮਿਲਿਆ ਹਰੇ ਹਾਂ ਜਦੋਂ ਵੀ ਬੇੜਾ ਹੁੰਦਾ ਹੈ ਉਦੋਂ ਹੀ ਬਾਰਿਸ਼ ਪੈਂਦੀ ਐ ਐਵੇਂ ਰੋਜ਼ ਨਹੀਂ ਬਾਰਿਸ਼ ਪੈਂਦੀ ਹੁੰਦੀ ਬਾਰਿਸ਼ ਨਹੀਂ ਵੀ ਰੁੱਤ ਹੁੰਦੀ ਐ ਇੱਕ ਹੋਏ ਤਾਂ ਹੁਕਮ ਹੈ ਰੁੱਤੀ ਹੁੰਦੀ ਰੁੱਤ ਹੋਏ ਇਹ ਰੁੱਤਾਂ ਤਾਂ ਇੱਕ ਹੋ ਕੇ ਉੱਗਿਆ ਕੋਈ ਵੀ ਜਦੋਂ ਖੋਕੇ ਉਹ ਬਜ਼ਾਰ ਉਤੋਂ ਦੀ ਰਤੋ ਫਾ ਵੀ ਰਤੋ ਦੀ ਧਰਤੀ ਹਰੀ ਭਰੀ ਹੋਣੀ ਹੁੰਦੀ ਹੈ ਇੱਕ ਦੌਮ ਜੋ ਬੀਜ ਧਰਤੀ 'ਤੇ ਹੈ ਗੁਪਤਾ ਜਿਹੜਾ ਗੁਪਤ ਪਈਆਂ ਚੀਜ਼ਾਂ ਕਈ ਕੋਡ ਦਰਸ਼ਨ ਪ੍ਰਭ ਇਹ ਧਰਤੀ 'ਚ ਬੀਜ ਪਏ ਗੁਪਤ ਇਹਨੇ ਹਰਿਆ ਜਾਣਾ ਸਾਰੇ ਜੀ ਜਿਹਨੇ ਪਿਆਸ ਹੈ ਪਈ ਹਰਿਆ ਇਹ ਸਾਰੇ ਜੱਬੇ ਉੜੇ ਦੇ ਜੜ ਫੜ ਜਾਂਦੇ ਨੇ ਬਾਰਜ ਪੈਂਦੀ सारे ਜੜ ਫੜਿਆ ਉਹਨੇ ਸਾਰੇ ਜੀ ਸਾਧ ਧਰਤ ਪਈ ਹਰਿਆਵਲੀ ਜੀ ਜੀ ਸਤਿਗੁਰੂ ਮਛਾ ਗਿਆ ਜਿੱਤੇ ਵੀ ਸ਼ਬਦ ਗੁਰੂ ਪ੍ਰਗਟ ਹੋ ਗਿਆ ਉਹ ਤਾਂ ਤਾਂ ਹਰਿਆਵਲੀ ਹੋ ਗਈ ਲੋਕਾਂ ਨੂੰ ਪਤਾ ਲੱਗੇ ਜਾਣਾ ਸਮਝਾਏ ਜਾਣੀ ਦਰਸ਼ਨ ਪ੍ਰਪਿਆਸ ਉਹ ਬੀਜ ਰੂਪ ਚ ਪੈਦਾ ਦਾ ਬੀਜ ਨੇ ਉਹ بارش ਭਈ ਜਬੇ ਕਹਿੰਦਾ ਧਰਤੀ ਨੇ ਪੁਕਾਰ ਕੀਤੀ ਧਰਤੀ ਚ ਬੀਜ ਪਿਆ ਉਹਨੇ ਪੁਕਾਰ ਕੀਤੀ ਹਰਦੇ ਆਨੇ ਪੁਕਾਰ ਕੀਤੀ ਜਿਸੇ ਦਰਸ਼ਨ ਪਿਆਸ ਹੈ ਜਿਹੜੇ ਜਿਹੜੇ ਹਰਦੇ ਵਿੱਚ ਦਰਸ਼ਨ ਪਿਆਸ ਹੈ ਉਹਦੀ ਪੁਕਾਰ ਤੋਂ ਇਹ ਗੱਲ ਹੋਈ ਆ ਕਹਿੰਦਾ ਮਤਲਬ ਇਹ ਹੈ ਤਰਕੋਂ ਮਿਲਿਓ ਆ ਉਹਨਾਂ ਬਾਰੇ ਬਾਰ ਹੀ ਪੈ ਰਹੀ ਹੈ ਮੇਰੇ ਵਾਸਤੇ ਹੀ ਪੈ ਰਹੀਓ ਕਰਦੇ ਇਹ ਰੰਗ ਆ ਜਿਹੜੀ ਸੁਖਬੀ ਦੀ ਬਾਣੀ ਲਿਖ ਰਹੇ ਨੇ ਸੁਖਬੁਨਾਚ ਜਿਹੜੀ ਲਿਖ ਰਹੇ ਨੇ ਬਾਣੀ ਇਹ ਦੁਨੀਆਂ ਦੇ ਮਨਾਂ ਦੇ ਵਿੱਚ ਇਹਨੇ ਸ਼ਾਂਤੀ ਠੰਡ ਵਰਤੌਣੀਆਂ ਤਾਂ ਇਹ ਆਈ ਹੈ ਧੁਰ ਬਾਣੀ ਆ ਗਏ ਰਹੇ ਹੋ ਮੇਰੇ ਵਾਸਤੇ ਹੀ ਆਈ ਕੁਆਂ ਗਤਰੇ ਬੇਰੇਵਾ ਸਰੀਆਈ ਕੱਲੇ ਵਾਸਤੇ ਤਿਲਕੋ ਮਿਲੋ ਪਰੋਗਨਾ ਚ ਤਿਲਕੋ ਮਿਲੋ ਪਰੋਗਨਾ ਆਸ ਇਹ ਪਰੋਗਨਾ ਉਹ ਤਾਂ ਉਹਨਾਂ ਨੂੰ ਮਿਲਿਆ ਦਰਸ਼ਨ ਪ੍ਰਿਆਸ ਆਲੇ ਉਹ ਵੀ ਬਣਾ ਇਹੀ ਦੀ ਕਿਰਪਾ ਕੇ ਸਜੇ ਹਮ ਬਣਾ ਮੇਰਾ ਜਨਮੇ ਤਾਂ ਹੈ ਗੁਰੂ ਜਨਮ ਪਦਾਸ ਮਿਲਿਆ ਤਾਂ ਗਾਂਹੇ ਨੂੰ ਦੇਣਾ ਸੀ ਬਸ ਹਾਂਜੀ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤੇ ਲਾਗਾ ਰੰਗ ਕਈ ਕੋਟ ਮੰਗਾ ਸਤਸੰਗ ਕਈ ਕਰੋੜ ਨੇ ਜਿਹੜੇ ਸਤਸੰਗ ਭਗਦੇ ਨੇ ਸਤਸੰਗ ਮੰਗਣ ਵਾਲੇ ਵੀ ਕਈ ਕਰੋੜ ਨੇ ਪਰ ਸਤਸੰਗ ਦੇਣ ਵਾਲਿਆਂ ਨੇ ਸਤਸੰਗ ਦੇ ਅਰਥ ਬਤਾਏ ਸਤਸੰਗ ਦਾ ਦੁਨੀਆ ਚਾਹੁੰਦੀ ਹੈ ਜਿੱਥੇ ਜਾ ਸਤਸੰਗ ਜਿੱਥੇ ਜਾ ਸਤਸੰਗ ਕੋਈ ਦੱਸੇ ਵੀ ਸਤਸੰਗ ਕੀ ਹੁੰਦਾ ਸਤਸੰਗ ਰੋਣੇ ਵਾਲਾ ਕੋਈ ਸਮਝਦਾ ਸਾਥ ਸੰਗ ਬਿੰਦਾ ਜੀ ਕੇ ਤੋਂ ਲੋਕ ਤਰੇ ਬਿਲਦੇ ਨੇ ਉਹ ਤਾਂ ਸਾਥ ਸੰਗ ਤਾਂ ਨੇ ਕੋਈ ਕਰਾਉਂਦਾ ਹੈ ਨਹੀਂ ਭਟਕਦੇ ਫਿਰਦੇ ਨੇ ਉਹ ਸੰਦੇ ਨੇ ਵੀ ਸਾਥ ਸੰਗ ਕੋ ਚੰਗੀ ਕੀ ਜਾ ਸਾਥ ਐਂ ਤਾਂ ਆਪ ਹੀ ਕਹਿਣਾ ਨੇ ਉਹ ਸੰਤ ਸਤ ਸੰਗ ਹੋ ਜਾਂਦਾ ਪਰ ਉਹ ਜੋ ਕਹਿੰਦੇ ਨੇ ਜਿਹੜੇ ਸਤ ਸੰਗ ਕਰ ਜਾਂਦੇ ਨੇ ਉਹਨਾਂ ਨੂੰ ਦੀ ਪ੍ਰਾਪਤੀ ਨਹੀਂ ਹੁੰਦੀ ਉਹਨੂੰ ਦੱਸਣ ਪ੍ਰਾਪਤੀ ਕਿਉਂ ਨਹੀਂ ਹੁੰਦੀ ਇਹਦਾ ਤੁਹਾਡਾ ਸਤ ਸੰਗ ਹੈ ਦੀ ਝੂਠਾ ਤੁਹਾਡਾ ਤੁਹਾਨੂੰ ਖੁਦ ਨਹੀਂ ਪਤਾ ਸਤ ਕੀ ਹੁੰਦਾ ਸਤ ਵਾਲੇ ਤੁਹਾਡੇ ਸਤ ਤੋਂ ਉਹ ਚੀਜ਼ਾਂ ਉਹ ਅਵਸਥਾ ਕਿਉਂ ਨਹੀਂ ਪ੍ਰਾਪਤ ਹੁੰਦੀ ਜਿਹੜੀ ਸਤ ਤੋਂ ਹੋਣੀ ਹੈ ਇਹਦੀ ਤੋਂ ਜੋ ਪ੍ਰਾਪਤ ਹੋਣਾ ਚਾਹੀਦਾ ਇਹਨਾਂ ਦੇ ਸੰਤਾਂ ਦੇ ਆ ਜਿਹੜੇ ਗੁਰੂ ਬੜੇ ਬੈਠੇ ਨੇ ਇਹਨਾਂ ਦੇ ਸਤ ਸੰਗ ਚੋਂ ਕਿਸੇ ਨੂੰ ਚੀਜ਼ ਪ੍ਰਾਪਤ ਹੋ ਰਹੀ ਹੈ ਬਸ ਇੱਥੇ ਖੜੀ ਹੋ ਗਏ ਜੇ ਨਹੀਂ ਹੋ ਰਹੀ ਤਾਂ ਸਤ ਨਹੀਂ ਹੈ ਉਹ ਘੁਬਰਾ ਕਰ ਕਰਦੇ ਨੇ ਔਰ ਘੁਬਰਾ ਆਪ ਬੜੇ ਧੋਖੇ ਜਨ ਲੋਕਾਂ ਨੂੰ ਧੋਖਾ ਦੇ ਰਹੇ ਨੇ ਸਤ ਦੀ ਖੋਜ ਕਰੋ ਜੇ ਅਮਨ ਸ਼ਾਂਤੀ ਚਾਹੁੰਦੇ ਨੇ ਸਤ ਪਹਿਲਾਂ ਹੁੰਦਾ ਕੀ ਹੈ ਉਹਦੀ ਪ੍ਰੈਕਟੀਕਲੀ ਉਹਦੀ ਦੇਖ ਰਹੇ ਪਰ ਪ੍ਰੈਕਟੀਕਲ ਹੋਏ ਰਿਜ਼ਲਟ ਵੀ ਹੁੰਦੇ ਨੇ ਜਿੰਨਾ ਜਰੂਰ ਦੇ ਪ੍ਰੈਕਟੀਕਲ ਸਤ ਸੰਦੇ ਰਿਜ਼ਲਟ ਨਹੀਂ ਹੁੰਦੇ ਉਹਨਾਂ ਜਿਹੜੋ ਸਤ ਸੰਦੇ ਹੀ ਹੈ ਸੰਗੋ ਮਾਇਆ ਦਾ ਕਭੀ ਮਾਇਆ ਦੀ ਗੱਲ ਨਹੀਂ ਹੋ ਸਕਦੀ ਸਾਰ ਸਤ ਸੰਦੇ ਦੁਨੀਆ ਤੋਂ ਕਨੇ ਲੋਕਾਂ ਤੋਂ ਪਰੇ ਹੁੰਦਾ ਜਿੰਨੇ ਲੋਕਾਂ ਤੋਂ ਪਰੇ ਹੈ ਕੂੜ ਜਿਹੜਾ ਸਾਰੀ ਦੁਨੀਆ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਜਿਹੜਾ ਸੰਸਾਰ ਤੋਂ ਤੁਹਾਨੂੰ ਪਰੇ ਲੈ ਜਵੇ ਕੱਢ ਕੇ ਬਿਠੇ ਨੂੰ ਸਵਾ ਦੇ ਵਿੱਚੋਂ ਉਹ ਸੰਸਾਰ ਤੋਂ ਤੋੜ ਦੇ ਵੇਲਾ ਕਰ ਦੇ ਆਤਮਿਕ ਮੰਡਲ ਦੇ ਵਿੱਚ ਰੱਖੇ ਹੋਣਾ ਚਲੋ ਜਿੰਨਾ ਕਰੇ ਬੋਲੇ ਉਹ ਸਾ ਸੰਗ ਵਰਨਾ ਸਾ ਹੁੰਦਾ ਹੀ ਮਾਇਆ ਨਾਲ ਸੰਗ ਦਾ ਹੁੰਦਾ ਹੀ ਜਿੱਦਾਂ ਜੇ ਤੁਹਾਨੂੰ ਲੋਭ ਦੀ ਗੱਲ ਕਰਦਾ ਹੈ ਵੀ ਇਥੋਂ ਉਹ ਮਿਲੇ ਉਹ ਮਿਲੇ ਆ ਕਹਾਣੀ ਸਮਝਦਾ ਹੈ ਲੋਭ ਹੀ ਹੁੰਦਾ ਸੋ ਸਤਸੰਗ ਦਾ ਛੁੱਟ ਸੁੱਖਾਂ ਦੀ ਪ੍ਰਾਪਤੀ ਦੀ ਗੱਲ ਹੈ ਸੁਖਸਾਲ ਦੇ ਵਿੱਚ ਐਸੀਆਂ ਸਾਖੀਆਂ ਨੇ ਉਹ ਛੁੱਟ ਜਾਂਦਾ ਸਤਸੰਗ ਮੁੱਦਾ ਹੀ ਨਹੀਂ ਹੋ ਪਹਿਲਾਂ ਲੋਕ ਦੇਖਣ ਵੀ ਸਤਸੰਗ ਮੁੱਦਾ ਕੀ ਹੈ ਸਤਸੰਗ ਉਹ ਹੈ ਜਿੱਦੇ ਵਿੱਚ ਸਤਸੰਗ ਵਾਲੇ ਗੁਣ ਹੋਣ नहीं ਜੋੜ ਸੰਗ ਜਦੋਂ ਸਤ ਸੰਗ ਦਾ ਪਤਾ ਲੱਗ ਗਿਆ ਦੁਨੀਆ ਨੂੰ ਆਵਸਥਾ ਇੱਕਦਮ ਬਦਲ ਜੂਗੀ ਆ ਜੋ ਪਛਾ ਸਾਰਾ ਇਹਦਾ ਕਾਨੂੰਨ ਦੀ ਲੋੜ ਨਹੀਂ ਹੈ ਇਹਦੇ ਫੌਜ ਦੀ ਕਿਸੇ ਪੁਲਿਸ ਦੀ ਕਾਸੇ ਦੀ ਲੋੜ ਨਹੀਂ ਲੋਕ ਆਪੇ ਹੀ ਹਟ ਜਾਣਗੇ ਸਾਰੇ ਜੋ ਇਹ ਰੌੜਾ ਪਾ ਰਹੇ ਨੇ अप्सरा सरकार है जो राज का रहने पहला बोल जब हो नहीं करते दरई में पांच डंडे सारे साथ उने आना कोई सारे ग्रामीण पेशा आदमी यहां पे अधूरे हक खाना जोर नहीं दोदी काम खींच के कुर्सी वो ते जाने जोर नहीं जोर अशांत करके उधर राज पर करके अपना इधर सब शांति दे देना ये लीडरਾਂ ਚ ਕੋਈ ਲੀਡਰ ਇਹ ਬੰਦਾ ਚੱਬਾ ਨਹੀਂ ਹੈ ਚੱਗੇ ਆਦਮੀ ਨੇੜੇ ਜਾਂਦੇ ਹੀ ਨਹੀਂ ਇਹਨਾਂ ਦੇ ਇਹ ਚੱਗੇ ਆਦਮ ਨੂੰ ਨੇੜੇ ਲਿਆਉਂਦੇ ਵੀ ਨਹੀਂ तो ਉਹ ਕਹਿੰਦੇ ਭਾਈ ਤੁਸੀਂ ਆਪਣੇ ਜੇ ਪ੍ਰਜਾ ਹੈ है ਹੈ ਜਿਹਦੀ ਜਧਾ ਰਾਜੇ ਵੀ ਹੈ ਜੀ ਦੇ ਉਹ ਗੱਲ ਉਹ ਜਾਂ ਵੀ ਕਰਦੇ ਕਰਦੇ ਵੀ ਨਾ ਹੋ ਵੀ ਜਾਂਦਾ ਔਰ ਜਧਾ ਰਾਜਾ ਤथा ਪ੍ਰਜਾ ਰਹੂਗੀ ਅੱਜ ਕੱਪੋ ਕੰਮ ਜਿਹੜੀ ਅੱਜ ਦੀ ਸਰਕਾਰ ਹੈ મોદી ਦੀ ਇਹਨਾਂ ਹੁੰਦਾ ਬੰਨਾ ਹੀ ਪਊਗਾ hindu ਕੁੱਤਾ ਹੈ ਜੋ ਮਤ ਮੰਗੀ ਹੈ ਜਧਾ ਰਾਜਾ ਤथा ਸਾਰਾ ਜਾ ਵੀ ਰਹਿ ਜਾਈਏ ਉੱਤੋਂ ਤੋਂ ਕਰਦੇ ਨੇ ਹਿੰਦੂਤਵਾਦੀ ਗੱਲੇ ਦੀ ਇਹ ਲੋਝ ਹੈ ਜੇ ਵਾਕਈ ਹਿੰਦੂਤਵਾ ਹੈ ਤਾਂ ਪ੍ਰਤਾਪ ਨਾਲ ਹੀ ਸਾਰਾ ਬੰਦ ਹੋ ਜਾਣਾ ਚਾਹੀਦਾ ਪੁਰਸ ਦੀ ਲੋੜ ਨਹੀਂ ਪੁਰਸ ਦੀ ਕਾਦੀ ਲੋੜ ਹੈ ਪੁਰਸ ਦੀ ਲੋੜ ਨਹੀਂ ਕ੍ਰਾਈਮ ਹਟਾਉਣ ਵਾਸਤੇ ਰਾਜੇ ਦੇ ਪ੍ਰਤਾਪ ਦੀ ਲੋੜ ਹੈ ਰਾਜੇ ਦੇ ਮਾਨਤੇ ਲੋੜ ਹੈ ਅਫਸਰਾਂ ਦੇ ਮਾਨਤੇ ਲੋੜ ਅਫਸਰਾਂ ਦੇ ਅੰਦਰ ਸਾਰਿਆਂ ਨਾਲ ਇੱਕ मतलब इको या शुरू कर दी इच्छा शक्ति की लोड़ है ये ठीक हो जी होदे ते बेई ईमानदारी है कत ईमानदारी वाली रोज वाली ईमानदारी इच्छा दे हां जी कई कोट मांगे सत्संग पार ब्रह्म ते रंग रंग कई कोट मांगें सत्संग कई कोट सत्संग सत्संग कौन मांगदे रे जिना पार ब्रह्म दा रंग लगया لوکانو ساتھ سنگ بارے ہی دسیا جی انہاں نے کی ہوندا ہے جتے بھیڑ کٹی को لی اوتے چائے کو پلان ہے بندا ہووے پر علیو بغیر پیڑ کٹی ساتھ سنگ ہو گیا جی بلیک میل کیتا ہے لوکا دے ਧਰਮ دے نوں تے جinna جے ਧਰਮ دی بلیک میلنگ نوں نہیں سمجھیا جاندا اوناں چن ਧਰਮ ਕੋ ਬੰਦੇ ਆਦੇ ਧਰਮ ਕੋ ਬੰਦੇ ਆ ਬੀਠੀ ਦਿਨੀਆਂ ਰਾਜੇ ਨੂੰ ਕਿ ਬੀਠੀ ਕਰ ਲੈ ਔਰ ਰਾਜੇ ਨੇ ਖੁਦ ਰਾਜ ਪ੍ਰਬੰਧਨ ਹੈ ਖੁਦ ਬਹੁਤ ਹੈ ਬੰਦੇ ਬਾੜ ਤੇ ਧਰਮ ਦੇ ਵਿੱਚ ਕ腐ਟ ਸੰਤ ਕਿ ਇਹ ਬਦਾਮ ਰਹਿਣ ਸਾਡੇ ਬਲੂਗਣੀ ਨਾ ਥੋੜਨ ਸੰਤ ਜਿਹੜੇ ਦਾ ਸੰਤ ਨੇ ਚੰਗੇ ਉਹਨਾਂ ਦੀ ਤਾਂ ਵੈਲਿਊ ਹੈ ਜੀ ਉਹਦਾ ਬਹੁਤਾ ਕੰਪੀਟੀਸ਼ਨ ਨਹੀਂ ਜਾਂਦੇ ਉਹਨਾਂ ਦੀ ਗੱਲ ਛੇ ਹੈ ਜੀ ਜਿਨ੍ਹਾਂ ਦੀ ਛੇ ਹੈ ਉਹ ਤੇਰੇ ਵਰਗੇ ਜਿਹਨਾਂ ਦੀ ਛੇ ਹੈ ਸਰਕਾਰ ਚ ਉਹ ਸਰਕਾਰ ਨਾਲ ਉਹਨਾਂ ਦਾ ਸੁਭਾਅ ਵੀ ਮੇਲ ਖਾਂਦਾ ਉਹਨਾਂ ਦਾ ਸੁਭਾਅ ਸਰਕਾਰ ਨਾਲ ਮੇਲ ਖਾਂਦਾ ਤਾਂ ਇਹ ਸੇ ਉਹਦੇ ਵੀ ਕੋਈ ਅਤੀ ਸੇ ਹੈ ਨਹੀਂ ਤਾਂ ਇਹ ਉਹਨਾਂ ਦਾ ਮੇਲ ਨਹੀਂ ਖਾਂਦਾ ਉਹਨਾਂ ਦਾ ਤਾਂ ਕਸ ਤੋਂ ਬਸ ਨਹੀਂ ਹੋਣਾ ਕਸ ਤੋਂ ਬਸ ਨਹੀਂ ਹੋਣਾ ਉਹਨਾਂ ਦੇ ਸੱਚ ਤੋਂ ਉਹਦੇ ਕੋਲ ਸਰਕਾਰ ਰਾਜਾ ਕਿਉਂ ਆਊਗਾ ਰਾਜੇ ਦਾ ਕਾੜੂ ਵਾੜੋ ਟੱਕਰੇ ਚ ਬੈ ਲਿਆ ਜਾ ਕੇ ਰੈਣੀ ਦਾ ਨੋਨ ਤੇ ਉਹਨੇ ਕੀ ਕਰ ਮੱਥਾ ਟੇਕਿਆ ਠੀਕ ਆ ਪਰ ਇਹਨੂੰ ਮੱਥਾ ਦੂਰੋਂ ਚਲੋ ਠੀਕ ਹੈ ਟੇਕ ਉਹਨੇ ਵਿਜੀ ਲੈਣਾ ਉਹਦੇ ਵੀ ਜੀ ਲੈਣਾ ਰਾਜੇ ਆਰ ਹੋਰ ਕਿਸੇ ਤੇ ਕਹੋ ਜੀ ਜਿੰਨ ਤੋਂ ਹੋਏ ਆਪ ਸੁਪਰਸ਼ੰਨ ਦਾਨਿਕ ਤੇ ਜਨ ਸਦਾ ਧਨਤਾ ਹਾਂ ਜਿੰਨ ਕੋ ਹੋਏ ਆਪ ਸੁਪਰਸੰਧ ਸੁਪਰਸੰਧ ਦਾਨਿਕ ਤੇ ਜਨ ਪਾਰ ਬ੍ਰਹਮ ਹੀ ਪ੍ਰਸੰਧ ਹੋ ਜਵੇ ਦਾਨਿਕ ਜਨ ਸਦਾ ਧਨਤਾ ਪ੍ਰਸੰਨ ਉਹਦੇ ਤੇ ਹੁੰਦਾ ਜਿਹੜੇ ਕਈ ਕੋਟ ਨੂੰ ਦਰਸ਼ਨ ਪ੍ਰ ਪਿਆਸ ਹੈ ਜਿਹਦੇ ਤੇ ਉਹ ਵਰਖਾ ਕਰਦ ਹੁੰਦਾ ਨਾ ਉਹਦੇ ਪਰਸੰਦ ਹੁੰਦਾ ਬਾਕੀ ਪਾਣੀ ਦਾ ਸਾਰਿਆਂ ਨੂੰ ਮਿਲਣਾ ਹੁੰਦਾ ਉਹ ਕਾਰਨ ਕੀਦੇ ਤੇ ਵਰਖਾ ਹੋਈ ਹੈ ਕਾਰਨ ਜੇ ਇੱਕ ਜੰਗਲ ਚ ਇੱਕ ਬਿਰਛਾ ਹੈ ਪਰ ਖਦਾ ਉਹ ਜ਼ਿਆਦਾ ਸਾਰੇ ਹੀ ਹੋਣੀਓ ਫਿਰ ਉਹਦਾ ਸਾਰੇ ਹੀ ਫੈਲਣੀ ਹੈ ਸਾਰਿਆਂ ਨੂੰ ਸੋਚੀ ਆਉਂਦੀ ਹੁੰਦੀ ਹੈ ਸਾਰੇ ਲੋਕ ਹੁਣ ਵਿਚਾਰ ਕਰਦੇ ਨੇ ਸਰਬਉੱਚ ਨਿਗਾਰਾ ਰੱਖਦੇ ਨੇ ਸਾਰੇ ਲੋਕ ਕੋਈ ਸ਼ਸਦ ਦੇ ਵਿੱਚ ਕਿੱਥੇ ਗੜਬੜਾ ਹੈ ਸਖਾਰੀਆਂ ਦੀ ਵੀ ਹੁਣ ਜਿਹੜਾ ਉੱਚੀ ਹੋਈ ਹੋਈ ਐ ਜਿਹੜੇ ਥੱਲੇ ਵਾਲੇ ਲਖਾਰੀ ਤੇ ਚੁੱਪ ਕੋਈ ਕਹਿੰਦਾ ਲਖਾਰੀਆਂ ਨੂੰ ਕਹਿੰਦਾ ਤੁਸੀਂ ਅੰਡਰਵਰਡ ਲਿਖੇ ਜਾਂਦਾ ਚੰਗੀ ਗੱਲ ਲਿਖੋ ਜਿਹਨਾਂ ਸਮਾਸ ਸੁਧਾਰੋਗੇ ਸਮਾਸ ਸੁਧਾਰੋਗੇ ਕਦਾਂ ਅਕਲ ਕਿੱਥੇ ਲਖਾਰੀਆਂ ਲਖਾਰੀਆਂ ਨੂੰ ਇੰਦੀ ਅਕਲ ਕਿੱਥੇ ਉਹ ਤਾਂ ਜਦਾਂ ਥੋੜ੍ਹੀ ਥੋੜ੍ਹੀ ਇਹਨਾਂ ਦੀ ਗੱਲ ਲਖਾਰੀਆਂ ਆਮ ਲਖਾਰੀਆਂ ਦੀ ਗੱਲ ਤੋਂ ਪਰ ਉਹ ਪਰੇ ਚਲੀ ਗਈ ਗੱਲ ਬਿਨਾਂ ਦੇ ਬਸੇ ਗੱਲ ਨਹੀਂ ਸੁਧਾਰੇਗਾ ਬਿਗਾਲੇ ਨਾ ਬਗਸਦਾ ਕਰਨ ਦੀ ਬਸੇ ਗੱਲ ਨਹੀਂ ਆ